ਿਕਾਇਤ ਦੂਸਰੀ ਇੱਕੋ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਹਿਕਾਇਤ ਸ਼ਨੀ ਦੇਵ ਰਾਜ ਹੈਤ ਲੀਵ ਨਿਸ਼ਸਤਾ ਬੁਧਨ ਜਦ ਮਾਨੋ ਮਹੀ ਕੀ ਓਰਾ ਹਮੀ ਪਿਸਰੇ ਚਹਾਰ ਕੇ ਰਜ਼ਮ ਦਰ ਬਜ਼ਮ ਆ ਮੁਕਤਾ ਕਾਰ ਬਰ ਅਜ਼ਮੰਦਰਾ ਚੋ ਅਜ ਮਸਤ ਕਿ ਚਾਵਕ ਰਿਕਾ ਦਸਤ ਚਹਾਰੋ ਸ਼ੇਹ ਪੇਸ਼ ਪਿਸਰਾ ਮੁਖਾ ਜੁਦਾ ਵਰ ਜੁਦਾ ਕੁਰਸੀਏ ਜ਼ਰ ਨਿਸ਼ਾਨ ਬੇ پرشید دان آئے دولت پرست अजी اندروں بادشاہی کاس ہست سنی دار عطا آئے تان شہنہا با تمکین پا سکے الم بار پوشاد با گفتند خوش دین دان آئے نگز ਅਗਰ ਸ਼ਹਿਬਿ ਗੋਏ ਬਿਗੋਇਮ ਜਵਾਬ ਨਮਾਇਮ ਬਤੋ ਹਾਨ ਈ ਬਾਸਵਾ ਹਰਾਂ ਕਸ ਕੇ ਯਜਦਾਨ ਯਾਰੀ ਦਿਹਦ ਬਾਕਾਰੀ ਜਹਾਂ ਕਾਮਗਾਰੀ ਦਿਹਦ ਕਿ ਕੁਨੇ ਵਜ਼ਾਂ ਪਸ ਆਜ਼ਮਾਈ ਕੁਨੇ ਯਕੇਰਾ ਦਿਹਦ ਫੀਲ 10000 ਮਸਤ ਹੰਹਾ ਮਸਤੀਓ ਮਸਤ ਜ਼ੰਜੀਰ ਬਸਤ ਦਿਗਰ ਰਾਤ ਦਿਹਦ ਅਸਪ ਪਾਂ ਜੇ ਜ਼ਰ ਸਾਖ ਤਾਜ਼ੀਨ ਚੂ ਨੌ ਵਾਰ ਸਿਆਮ ਰਾਤ ਦੇ ਹਦ ਸ਼ੁਤਰ ਸੇ ਸੱਦ ਹਜ਼ਾਰ ਹਮਾ ਨੁਕਰਾ ਬਾਰੋ ਹਮਾ ਜਰ ਨਿਗਾਰ ਚੋ ਹਮਰਾਤ ਦੇ ਹਦ ਮੁੰਗ ਯਕ ਨੁਖਦ ਨੀਮ ਆਦਮਰ ਤੇ ਆਜ਼ਾਦ ਆਕਲ ਅਜ਼ੀਮ ਬਿਆਵੁਰਦ ਪੂਰੇ ਅਕਲ ਖਾ ਨਾਕ ਜ਼ਾਂ ਤੇ ਹਮੀ ਖਾਸਤ ਕੋ ਤੁਮ ਜੀ ਕੁਨਦ ਖਿਰਦ ਆਜ ਜੀ ਕੁਨਦ ਦਫਨ ਕਰਦ ਹਰ ਦੋ ਜਮੀ ਅੰਦਰਾਂ ਨਜ਼ਰ ਕਰਦ ਵਾਰ ਸ਼ੁਕਰ ਸਾਹਿਬ ਗਿਰਾਮ ਕੋ ਸ਼ਸ਼ ਮਾਹ ਹੈ ਗੁਸਤੰਦਰਾਂ ਦਫਨਵਾਰ ਪਦੀ ਧਾਮ ਦਾ ਸਭ ਜੇ ਨੋਵਾਰ ਬਰੇਜ਼ੀਦ ਦਹ ਸਾਲ ਤੁਖ ਮੇ ਇਕ ਬਰੇਜ਼ੀਦ ਹੈ ਪੀਸਤ ਬਾਰਿਸ਼ ਜੋ ਹਰ ਵਾਰ ਦਨ ਨਹਾਇ ਜੋ ਚਨਾ ਜ਼ਿਆਦਾ ਸ਼ੁੱਧ ਦੌਰ ਤੇ ਦਿਲ ਕਰਾਰ ਕਦੋ ਦਾਨਾ ਸ਼ੁੱਧਾਨ ਹਾਏ ਅੰਬਾਰ ਖਰੀਦਾ ਆ ਅਦਾਨਕਤ ਦਹ ਹਜ਼ਾਰ ਫੀਲ ਚੋ ਕੋਹੇ ਰਵਾਹਮ ਚੋ ਦਰਿਆਏ ਨੀਲ ਵਾਘੀਰਦੇ ਅਜੋ ਅਸਵ ਪਾਸਦ ਹਜ਼ਾਰ ਹਮਾ ਹਮਾ ਨੁਕਰਾਵਾਰ ਖਰੀਦ ਸੇ ਸਦ ਹਜ਼ਾਰੋ ਛੁਤਰ ਹਮਾ ਜ਼ਰਹ ਬਾਰੋ ਹਮਾ ਨੁਕਰਾਪੁਰ ਵਜਾਂਦਾਲ ਕੇ ਨਾਮੇ ਅਜਾਂ ਸ਼ਹਿਰ ਦੇਲੀ ਛੁਦਸਤ ਦਿਗਰਦਾਨ ਪਟਨ ਚੋ ਦੋਸਤਾਂ ਪਸੰਦ ਅਸਤ ਦੁਸ਼ਮਨ ਫਿਕਨ ਬਗੁਜ਼ਰੀਦ ਦੋ ਬਰ ਈ ਨਵਤ ਸਾਲ ਬਸੇ ਗਸ਼ਤ ਜੋ ਦੌਲਤੇ ਬੇਜਵਾਲ जो शस्त भारत अखत मानोमही बापु कृषिसत राम सहे हप्त दी बिगोएत बापेशीन कागज प्यार ते बक्षीद या मर चहार दा वीर कलम वर कलम जान के जवाने सुफल नालम बर ग्रप्त बा चे ते बक्षीद हजार बा कागज बुवी ता जुबान इस प्यार कागज बुवी ता बिगोएत जुबान ते बक्षीद शुद्ध पक्ष कस जदां ਜੋ ਬੇਸ਼ਨੀਦ ਸੁਖਨਾਤਮ ਹੀ ਪਾਨ ਮਾਨ ਫਰਿਸ਼ਤਾ ਸਿਫਤ ਜੂ ਮਲਾਇਕ ਮਕਾਨ ਬਯਾਰੀ ਮਰਾ ਪੇਸ਼ ਬਖਸ਼ਿੰਦਾ ਮਾਨ ਚਹਰਾ ਗੇ ਜਹਾਂ ਆਪ ਤਾ ਬੇਜਮਨ ਕੇ ਮੁਰਦੰਦ ਬਾਜੇ ਮੁਹਿਮ ਕੇ ਮਾ ਹਮ ਬਸਾ ਫੀਲ ਬਖਸ਼ੀ ਦਹਾਮ ਦਿਗਰ ਸ਼ੁਤਰਾ ਨੁਮਾ ਕੁਜਾਤੋ ਬਖਸ਼ੀਦ ਏ ਜਾਨਿਵਾ ਬਾ ਗੁਫਤਾ ਕੇ ਬਾਝੇ ਬਕਰ ਆਮਦੰਦ ਬਖਸ਼ੰਦ ਰੂ ਬੇਸ਼ੁਮਾਰ ਆਮਦੰਦ ਚੁ ਅਮਰਾ ਬਪੁਰਸ਼ੀਦ ਕੇ ਏ ਨੇਕ ਵਖਤ ਸਦਾਵਾਰ ਦੇਹੀ ਮਸਾਯਾਨ ਤਖਤ ਕੁਜਾਗਸ਼ਤ ਬਖਸ਼ਿਸ਼ ਤੋਂ ਮਹਾਰਾ ਭਈ ਸ਼ਬਦ ਹੁਕਮਤਾ ਹਕਮਤਾ ਬਿਹਾਰੇ ਹਮਾ ਹਮਾਫੀਲ ਅਸਬੋ ਅਦੋ ਸ਼ੁਤਰ ਬੇਸ਼ ਨਜ਼ਰ ਕਰਦ ਫੀਲੇ 21000 ਮਸਤ ਪੁਰੇ 1000 ਬਾਰੋ ਹਮਾ ਨੁਕਰ ਹਬਸਤ ਹਮਾ ਅਸਬ ਪਾਸ ਅੰਦ ਆਵਰੀਦ ਹਮਾ ਜ਼ਰਦੀਨ ਬੇਸ਼ੁਮਾਰ ਆਵਰੀਦ ਹਮਾ ਖੋਦ ਖਵਤਾਨ ਬਰ ਗੁਸ਼ਤਮਾ ਤੀਰ ਸ਼ਮਸ਼ੀਰ ਕੀਮਤ ਕਿਰਾ ਵਸੇ ਸ਼ੁਤਰ ਬਗਦਾਦ ਸਰ ਬਖਤਬਾਰ ਜਰੋਜ਼ਾ ਮਹਨੀਮਾਸਤੀ ਬੇਸ਼ੁਮਾਰ ਕੇ ਦਹਨੀਲ ਦਹ ਪਦਮ ਦੀਨਾਰ ਜ਼ਰਦੇ ਕਜੋਦੀ ਦਾ ਸ਼ੁਦ ਦੀਦ ਹੈ ਦੋਸਤ ਸਰਦ ਕੇ ਯਕਮੁੰਗ ਯਕ ਸ਼ਹਿਰ ਜੋ ਕਾਮ ਸ਼ੁਦ ਕੇ ਮੂੰਗੀ ਪਟਨ ਸ਼ਹਿਰ ਓ ਨਾਮ ਸ਼ੁਦ ਕੇ ਨੀਮਨੁਖਤਰਾ ਦਿਗਰ ਸ਼ਹਿਰ ਬਸਤ ਕੇ ਨਾਮੇ ਅਜੋ ਸ਼ਹਿਰ ਦੇਹਲੀ ਸ਼ੁਦ ਅਸਤ ਖੁਸ਼ ਆਮਦ ਬਾ ਤਦਵੀਰ ਮਾਨੋ ਮਹੀ ਖਿਤਾਬ ਅਸ਼ਬਾ ਦੋ ਤਾਜੋ ਮਹੀ ਬਸੇ ਬਦੇ ਅਕਲ ਤਦਵੀਰ ਹਜ਼ਾਰ ਸੇ ਉਹ ਅਸਤ ਬੇ ਅਕਲ ਆਲੂ ਦਹਮਗਜ਼ ਨਾ ਰਫਤਾਰ ਖੁਸਤਰ ਨਾ ਗੁਫਤਾਰ ਨਗਜ਼ੇ ਹਮੀ ਖਾਸ ਕੇ ਓਰਾ ਬਾਸ਼ਾ ਹੀ ਦੌਲਤ ਖੁਦਾ ਅਗਾਹੀ ਦੇ ਅਜ਼ੀਬ ਅਦ ਕਜੋ ਰੰਗ ਸ਼ਾਹਨ ਸ਼ਹੀ ਕੇ ਸਾਹਿਬ ਸ਼ੋਰਸਤਬਾ ਮਾਲਕ ਮਹੀ ਖਿਤਾਬ ਅਸ਼ਕਜੋ ਗਸ਼ਤ ਰਾਜਾ ਹਦਲੀ ਖিলাਫਤ ਬਖਸ਼ੀਦ ਮਾਨੋ ਮਹੀ ਆਜ਼ਾਦ ਕਰਦ ਨਾ ਦਾਨਿਸ਼ ਪਰਸਤੋ ਨਾ ਆਜ਼ਾਦ ਮਰਦ ਕਿ ਹੋ ਰਾਬਰੋ ਨਿਸ਼ਾਦ ਕਲੀ ਤੇਹ ਕੋਨ ਗੰਜਰਾ ਬਰ ਬਦੋਦਾਦ ਸ਼ਾਹੀ ਖੁਦ ਆਜ਼ਾਦ ਗਸ਼ਤ बापोशीत दलक्षर वा शुद्ध पदस्त विदेह साकी सागरे सबज रंग के मारा बकारस्त दर भक्त जंग वामन देह के बखताद माई कुनम जतिगे खुदाष्कार वाही कुनम